ਵਾਵਾ ਤਾਂ ਹੋ ਸੰਤ ਉਸਤਾਦ ਹਰਪਜਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਸ਼ਾਰਟ ਫਾਰਮ ਦੇ ਵਿੱਚ ਬੜੇ ਥੋੜੇ ਜਿਹੇ ਸਮੇਂ ਵਿੱਚ ਸਾਨੂੰ ਸੰਤ ਖਜਾਨ ਸਿੰਘ ਜੀ ਬਾਰੇ ਇੰਨਾ ਕੁਝ ਦੱਸ ਦਿੱਤਾ ਹੈ ਨਾਲ ਦੇ ਨਾਲ ਉਹਨਾਂ ਦੇ ਭਰਾਤਾ ਸੰਦਰਸ਼ਨ ਸਿੰਘ ਜੀ ਉਹਨਾਂ ਬਾਰੇ ਵੀ ਦੱਸਿਆ ਹੈ ਇੱਥੇ ਹੀ ਵਸਨੀ ਸੱਚਾ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ ਹੈ ਉਸ ਪਰਿਵਾਰ ਤੇ ਉਹਨਾਂ ਦੋਨੇ ਭਰਾਵਾਂ ਤੇ ਹੁਣ ਸੰਤ ਖੁੱਲਾ ਜੀ ਜਿਹੜੇ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਹੈ ਜਾਣਦੇ ਹਾਂ ਉਹ ਇਸ ਵੇਲੇ ਸਤਿਗੁਰੂ ਦੀ ਹਜ਼ੂਰੀ ਉਸੇ ਤਰ੍ਹਾਂ ਸੰਦਰਸ਼ਨ ਸਿੰਘ ਹੋਣਾ ਵਗਰ ਕੀਰਤਨਕਾਰ ਰਹੇ ਨੇ ਸੋ ਇਹ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਜਿਨੀ ਦਿਰ ਅਗਲੇ ਕਾਰਜਕ੍ਰਮ ਦੀ ਤਿਆਰੀ ਹੋ ਰਹੀ ਹੈ ਮੈਂ 10ਵਾਂ ਵਜਨਾਂ ਨੂੰ ਵੈਸੇ ਸਾਰਿਆਂ ਨੂੰ ਪਤਾ ਹੀ ਹੈ ਫਿਰ ਵੀ ਦੱਸਣਾ ਫਰਜ਼ ਬਣਦਾ ਸਟੇਜ ਤੇ ਸੰਤਾਰ ਭਜਨ ਸਿੰਘ ਜੀ 우ਸਤਾਦ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ 우ਸਤਾਦ ਬਣਾਇਆ ਪਹਿਲਾਂ ਇਹਨਾਂ ਨੇ 우ਸਤਾਦ ਅਮਦੇਦ ਅਲੀ ਖਾਨ ਸਾਹਿਬ ਤੋਂ ਸਿੱਖਿਆ ਪ੍ਰਾਪਤ ਕੀਤੀ ਫਿਰ ਤੇ ਪੰਡਿਤ ਮਹਾਦੇਵ ਪਹਿਲਾ ਪਹਿਲਾ ਸਤਿਗੁਰੂ ਜੀ ਪਾਸ ਪੰਡਿਤ ਮਹਾਦੇਵ ਜੀ ਪਾਸ ਫਿਰ ਹਾਂ ਮਹਾਰਾਜ ਬੀ ਸਿੰਘ ਫਿਰ ਸੱਚੇ ਪਾਸ਼ਾ ਵੱਲੋਂ ਇਹਨਾਂ ਨੂੰ ਆਗਿਆ ਹੋਈ ਕਿ ਤੁਸੀਂ ਸਿਤਾਰ ਵੀ ਵਜਾਓ ਔਰ ਕਈ ਬੰਦਿਆਂ ਨੇ ਇਹਨਾਂ ਨੂੰ ਪ੍ਰਸ਼ਨ ਵੀ ਕੀਤਾ ਕਿ ਤੁਸੀਂ ਗਾਣ ਤੋਂ ਬਾਅਦ ਸਿਤਾਰ ਹਾਈ ਲੈਵਲ ਤੋਂ ਲੋ ਲੈਵਲ ਕਿਸ ਤਰ੍ਹਾਂ ਇਹ ਕਹਿੰਦੇ ਮੈਨੂੰ ਸੱਚੇ ਪਾਸ਼ਾ ਦਾ ਹੁਕਮ ਹੈ ਉਸ ਤੋਂ ਬਾਅਦ ਫਿਰ ਉਸਤਾਦ ਅਮਜਦ ਅਲੀ ਖਾਨ ਤੋਂ ਸਾਬ ਤੋਂ ਇਹਨਾਂ ਨੇ ਸਿਤਾਰ ਸਿੱਖੀ ਹੈ ਔਰ ਸਤਕੂ ਸੱਚੇ ਪਾਸ਼ਾ ਜੀ ਇਹਨਾਂ ਤੇ ਬਹੁਤ ਕਿਰਪਾ ਸਾਰਨੋਂ ਵੱਡੀ ਗੱਲ ਹੈ ਹੋਣਾ ਆਪ ਜੀ ਨੂੰ ਜਸਤਰਾ ਪਿਛਲੇ ਇੱਕ ਤੋਂ ਹਫ਼ਤਿਆਂ ਤੋਂ ਆਪ ਜੀ ਸੁਣ ਹੀ ਰਹੇ ਹੋ ਸਾਡੇ ਕੋਲ 우ਸਤਾਦ ਚੰਦਰਮੋਹਨ ਜੀ ਜੋ ਦਿੱਲੀ ਤੋਂ ਆਏ ਹਨ ਜਿਹਨੇ ਰੋ ਤਿਆਰੀ ਕਰ ਰਹੇ ਹਨ ਬਾਰੇ ਮੈਂ ਦੱਸ ਹੀ ਦਵਾਂ ਇਹਨਾਂ ਨੇ ਆਪਣਾ ਜੋ ਤਬਲਾ ਸਿੱਖਿਆ ਹੈ ਪੰਡਿਤ ਹੀਰਾ ਲਾਲ ਜੀ ਕੋਲੋਂ ਇਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਹਨਾਂ ਕੋ ਗੁਰੂ ਸ਼ਿਸ਼ ਜਿਸ ਤਰ੍ਹਾਂ ਗੁਰੂ ਸ਼ਿਸ਼ਤਾ ਹਿਸਾਬ ਹੁੰਦਾ ਉਸੇ ਤਰ੍ਹਾਂ ਹੀ ਇੱਕ ਵਾਰ ਮੈਂ ਗੱਲ ਦੱਸਾਂ ਕਿ ਸੱਚੇ ਪਾਤਸ਼ਾਹ ਨੇ ਬੱਚਿਆਂ ਨੂੰ ਹੁਕਮ ਕੀਤਾ ਕਿ ਤੁਸੀਂ 3 ਮਿੰਟਾਂ ਚ ਵਜਾਣਾ ਔਰ ਬੱਚੇ ਜੋ ਤਿਆਰੀ ਕਰਦੇ ਸੀ ਅੱਧਾ-ਅੱਧਾ ਘੰਟਾ ਵਜਾਉਂਦੇ ਸੀ ਤੇ ਉਹ ਤਿਆਰੀ ਦੇ ਵਿੱਚ ਇੰਨਾ ਟਾਈਮ ਲਾ ਕੇ ਫਿਰ ਉਹਨਾਂ ਨੂੰ ਜਿਹੜਾ 3 ਮਿੰਟ ਵਜਣਾ ਨਾ ਬੜਾ ਮੁਸ਼ਕਲ ਜਿਹਾ ਲੱਗਦਾ ਸੀ। ਔਰ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਨੇ 3 ਮਿੰਟਾਂ 'ਚ ਨਿਵੇੜ ਦਿੱਤਾ ਨਾ ਸੱਚੇ ਪਾਤਸ਼ਾਹ ਨੇ ਕੋਲ ਸਾਧ ਕੇ ਉਹਨਾਂ ਨੂੰ ਪਿਆਰ ਦਿੱਤਾ ਔਰ ਆਖਿਆ ਕਿ ਇਹ ਉਸਤਾਦੀ ਹੈ। ਇਹ ਚੀਜ਼ ਆ ਜਿਹੜੀ ਕਰਨ ਵਾਲੀ ਹੈ ਕਿ ਜਿਹੜੀ ਤੁਸੀਂ ਸ਼ਾਰਟ ਫਾਰਮ ਦੇ ਵਿੱਚ ਕਰ ਸਕੋ। ਬੜਾ ਮੁਸ਼ਕਲ ਕੰਮ ਹੈ। ਹੁਣ ਆਪ ਜੀ ਉਸਤਾਦ ਚੰਦਰ ਜੀ ਨੂੰ ਸ਼ਰਵਨ ਕਰੋ।